ਸ਼ਲੋਕ ਮਹੱਲਾ ਤੀਜਾ ਨਾਨਕ ਨਾਵੋ ਕੁੱਥਿਆ ਹਲਤ ਪਲਤ ਸਭ ਜਾਏ ਜਬ ਤਬ ਸਭ ਹਿਰ ਲਿਆ ਮੁੱਠੀ ਦੂਜੇ ਪਾਇ ਦੇਖੋ ਉਹ ਦੂਜੇ ਪਾਸੇ ਆ ਗਿਆ ਜਿਹੜੇ ਨਾਮ ਤੋਂ ਵਿਛੜੇ ਹੋਏ ਨੇ ਆਪਣੇ ਬੋਲ ਨਾਲ ਟੁੱਟੇ ਹੋਏ ਨੇ ਉਹ ਨਾਮ ਨਾਲ ਜੁੜੇ ਹੋਏ ਸੀ ਆਪਣੇ ਬੋਲ ਨਾਲ ਜੁੜੇ ਹੋਏ ਸੀ ਜਿਹੜੇ ਉਹਨਾਂ ਦੀ ਗੱਲ ਉੱਪਰ ਆ ਕੁਣ ਦੂਜਿਆਂ ਦੀ ਗੱਲ ਸ਼ੁਰੂ ਕਰ ਲਈ। ਦੰਤ ਨਾਵੋਂ ਟੁੱਟਦਾ। ਜੇ ਨਾਮ ਨਾਂ ਟੁੱਟ ਗਈ ਏ, ਅੰਤਰਾਤਮਾ ਦੀ ਆਵਾਜ਼ ਨਾ ਟੁੱਟ ਗਈ ਏ। ਕਿਰਤੀ ਬਾਣੀ ਨਾ ਟੁੱਟ ਗਈ ਏ, ਉਹਦੇ ਨਾਲ ਟੁੱਟ ਕੇ ਗੱਲ ਕਰੀਏ, ਹਲਕ-ਪਲਕ ਸਭ ਰਵੇ। ਲੋਕ 'ਤੇ ਦਾ ਸਾਰਾ ਹੀ ਜਾਨ ਚਲਾ ਜਾਂਦਾ। ਲੋਕ 'ਤੇ ਲੋਕ ਦਾ ਜਾਨ ਨਹੀਂ ਰਹਿੰਦਾ ਫਿਰ। ਜਾਪ ਤਪ ਸੰਗਤ ਸਭ ਹਿਰ ਲੈ ਮੂਰਤੀ ਹੋਇਆ ਤਾਂ ਜਾਂ ਪਾਪ ਸਾਫ ਸਾਜਬ ਸਾਰਾ ਹੀ ਬੇਕਾਰ ਚਲੇ ਜਾਂਦਾ ਉਹਦਾ ਜਿਹੜੇ ਜਪਤਾਬ ਸੰਜਿਬ ਕੀਤਾ ਸਾਰਾ ਬੇਕਾਰ ਗਿਆ ਉਹਦਾ ਉਰਤੀ ਦੂਜੇ ਭਾਏ ਕਿਉਂਕਿ ਆਪਣੇ ਸਰੀਰ ਨੂੰ ਅੰਤਰਾਤਵਾਂ ਨੂੰ ਛੱਡ ਕੇ ਸਰੀਰ ਉਹ ਮੂਰਤੀ ਨੂੰ ਦੇਖ ਕੇ ਜਿਹੜੇ ਸਰੀਰ ਨੂੰ ਦੇਖ ਕੇ ਜਿਹੜੇ ਉਸ ਕਰਦੇ ਨੇ ਜਾਂ ਇਤਿਹਾਸੀ ਉਹ ਗੱਲ ਕਰਦੇ ਨੇ ਜਿਵੇਂ ਰਮਨ ਵਾਹ ਭਾਰਤ ਹੈ ਇਤਿਹਾਸ ਹੈ ਸਾਡਾ ਵੀ ਇਤਿਹਾਸ ਹੈ ਇਹ ਦੂਜੇ ਤੋਂ ਹੈ ਬਾਹਰਲੀ ਗੱਲ ਹੈ ਅੰਦਰਲੀ ਗੱਲ ਨੂੰ ਛੱਡ ਕੇ ਮਤਲਬ ਆਤਮ ਗਿਆਨ ਨੂੰ ਛੱਡ ਕੇ ਪਰਮ ਗਿਆਨ ਦੀ ਗੱਲ ਕਰਦੇ ਨੇ ਜਿਹੜੇ ਮਾਇਆ ਦੇ ਲੈਵਲ ਤੇ ਆ ਜਾਂਦੇ ਨੇ ਇਹ ਜਿਵੇਂ ਸਾਖੀਆ ਸੁਣੋ ਨੇ ਸਾਰੇ ਧਰਮਾਂ ਦੀ ਸਾਖੀ ਹੈ ਠੀਕ ਹੈ ਜੀ ਉੱਥੇ ਦੂਜੇ ਉਹ ਮਾਇਆ ਕਰਕੇ ਉਹਦੇ ਨਾਲ ਠੋਕਰੀ ਹੋ ਗਈ ਉੱਠੀ ਜੋ ਯਾਰ ਕਰਦੀ ਜਾਂਦਾ ਔਰ ਖੜੇ ਗਏ ਮਾਇਆ ਦੇ لالchni ਜਮਦਰ ਬੱਧੇ ਮਾਰੀਆਂ ਬਤੀ ਮਿਲੈ ਸਜ਼ਾਈ ਉਹ ਜਮਦਰ ਬੱਧੇ ਚ ਬਾਹਰ ਨਹੀਂ ਆ ਸਕਦੇ ਉਹ ਪਰਮ ਭੁੱਲੇ ਰਹਿੰਦੇ ਨੇ ਪਰਮੇ ਚ ਬੱਧੇ ਰਹਿੰਦੇ ਨੇ ਠੀਕ ਹੈ ਪੈਂਦੀ ਰਹੇ ਜਮਨ ਬਲ ਨਾਲ ਬੱਨੇ ਰਹਿੰਦੇ ਦੇ ਵਿੱਚ ਰਹਿੰਦੇ ਨੇ ਫਸੇ ਰਹੇ ਨੇ ਬਹੁਤੀ ਮਿਹਰੇ ਦੀ ਉਹਨੂੰ ਤੀਜਾ ਸੰਤਾਂ ਨਾਲ ਵੈਰ ਕਮਾਉਣ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਉਸ ਵੇਲੇ ਜਿਹੜਾ ਉਹ ਹੋ ਜਾਂਦੇ ਸੀ ਬਾਗੀ ਹੋ ਜਾਂਦੇ ਸੀ ਜਿਵੇਂ ਫਿਰੀ ਜਾਂਦਾ RAM Rai ਸੀ ਉਹਦਾ ਸਰਕਾਰ ਨਾਲ ਜਿਹੜੇ ਗੁਰੂ ਘਰ ਦੇ ਦੋਖੀ ਸੀ ਨਿੰਦਕ ਸੀ ਸੀ ਕਦਰ ਬੁਜਾਲੇ ਸੀ ਦੂਏਤੀ ਜੇ ਸੀ ਜਿਹੜੇ ਗੁਰੂ ਘਰ ਨਾਲ ਫੈਰ ਰੱਖਦੇ ਸੀ ਦੋਸਤ ਸੀ ਜਿਹਨਾਂ ਨੂੰ ਜਿਹੜੇ ਚਾਹਦੇ ਨਹੀਂ ਸੀ ਵੀ ਗੁਰਮਤ ਦਾ ਪ੍ਰਚਾਰ ਹੋਵੇ ਉਹਨਾਂ ਬਾਰੇ ਇਹ ਗਾਹ ਦੀ ਗੱਲ ਸੰਤਾਂ ਨਾਲ ਬੈਠ ਕਮਾਉਂਦੇ ਦੋਸਤਾਂ ਨਾਲ ਉਹ ਪਿਆਰ ਅੱਗੇ ਪਿੱਛੇ ਸੁਭਨ ਨਹੀਂ ਪਰ ਜਦ ਬਾਹਰੋਂ ਗਾਉ ਉਹਨਾਂ ਨੂੰ ਨਾ ਇੱਥੇ ਸੁਖਾ ਨਾ ਉਹ 300 ਕੇ ਦਾ ਹਾਂ 300 ਕੇ ਪਰ ਜਮਾ ਬਾਰੋਂ ਬਾਾਰ ਜਮਾ ਮੰਤਿ ਬਾਰੋਂ ਬਾਾਰ ਜਮਦਿਰ ਬਹਿਰਣਗੇ ਠੀਕ ਹੈ ਜੀ ਹਾਂ ਕਰੇ ਨਾ 부ਝਈ ਹੋਏ ਖਵਾਰ ਮੂੰਹ ਕਾਲੇ ਤਿਨਾਂ ਨਿੰਦਕਾਂ ਤਿਤ ਸੱਚੇ ਦਰਬਾਰ ਉਹ ਨਿੰਦ ਲਫਜ਼ ਐਨੂੰ ਨਿੰਦ ਕਹਿੰਦੇ ਨੇ ਗੁਰਬਾਣੀ ਦਾ ਨਿੰਦ ਕੌਣ ਹੈ ਉੱਤੇ ਆਗੀ ਡਿਫੀਨੇਸ਼ਨ ਸੰਤਾਂ ਨਾਲ ਪਿਆਰ ਕਮਾਉਂਦੇ ਦੁਸ਼ਟਾਂ ਨਾਲ ਉਹ ਪਿਆਰ ਉਹ ਨਿੰਦ ਸਨੇ ਉਹਨਾਂ ਕਦੇ ਵੀ ਕਦੇ ਨਹੀਂ ਜਾਂਦੀ ਉਹ ਰਾਜ ਦਰਬਾਰ ਨਾਲ ਮਾਇਆ ਕਰਕੇ ਜੁੜੇ ਹੋਏ ਨੇ ਔਰ ਕਾਲੇ ਕਰਕੇ ਜੁੜੇ ਹੋਏ ਨੇ ਇਹ ਜਿਹਾ ਨਾ ਬੁੱਧੀ ਦੁਬਦਾ ਹੋਏ ਖਵਾਰ ਦੁਬਦਾ ਦੇ ਵਿੱਚ ਖਵਾਰ ਹੁੰਦੇ ਨੇ ਉਹ ਕਾਲੇ ਤਨਾਂ ਨੇ ਨਿਤ ਤੇ ਸੱਚੇ ਦਰਬਾਰ ਉਹ ਸੱਚੇ ਦਰਬਾਰ ਠੀਕ ਹੈ ਜੀ ਨਾਨਕ ਨਾਮ ਵਿਹੋਣੀਆਂ ਨਾ ਉਰਵਾਰ ਨਾ ਪਾਰ। ਕਹਿੰਦਾ ਨਾਮ ਤੇ ਵਿਹੋਣੀਆਂ ਜਿਹੜੀਆਂ ਰੂਹਾਂ ਨੇ ਨਾ ਨਾ ਉਰਵਾਰ ਨਾ ਪਾਰ ਨਾ ਇੱਧਰ ਦੀਆਂ ਨਾ ਉੱਧਰ ਦੀਆਂ ਢੋਪੀਆ ਕੋਤਾ ਨਾ ਘੜਦਾ ਨਾ ਘਾੜਦਾ। ਉਹ ਬਸ ਆਉਣ ਜਾਣ ਜੇ ਤੁਰਿਆ ਰਹਿੰਦਾ। ਇਹ ਮਾਇਆ ਦੀ ਦੁਕਾਨ ਆ ਨਾ ਸੱਚਖੰਡ ਦੀ ਦੁਕਾਨ। ਰਾਣਾ ਢੋਲੀ ਪਾਸੇ ਦੀ। ਦੋਏ ਲੋਕ ਨਹੀਂ ਚੱਲਦੇ ਰੂਹ ਦਾ ਸੱਚਖੰਡ ਵਾਲੇ ਚੱਲਦੇ ਨੇ ਨਾ ਇਹ ਲੋਕ ਵਾਲੇ ਚੱਲਦੇ। ਜਬਨ ਬੰਦ ਪਿਆ ਰਹਿੰਦਾ। ਸੌਰੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰੱਤੇ ਮਨ ਮਨ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਉਹ ਹਰ ਨਾਮ ਦੇ ਨਾਲ ਬੰਦੇ ਅੰਦਰ ਹੀ ਰੰਗੇ ਜਾਂਦੇ ਨੇ ਉਹਨਾਂ ਦਾ ਅੰਦਰ ਹੀ ਰੰਗਿਆ ਜਾਂਦਾ ਹੈ ਕਰਕੇ ਰੰਗੇ ਜਾਂਦਾ ਸ਼ਰੀਰ ਕਰਕੇ ਨਹੀਂ ਚੜਦਾ ਠੀਕ ਹੈ ਜੀ ਬੰਨ ਬਾਈ ਜਿਨ੍ਹਾਂ ਬੰਨ ਜਾਂਦੇ ਇੱਕ ਆਰਾਮੇਗਾ ਜਿਨ੍ਹਾਂ ਇੱਕ ਬਿਨ ਦੂਜਾ ਕੋ ਨਾ ਜਿਨ੍ਹਾਂ ਨੇ ਮਾਨੋਰਜਿਤ ਕਰਕੇ ਇੱਕ ਤਾਂ ਕਰ ਲਈ ਉਹਨਾਂ ਵਾਸਤੇ ਹੋਇ ਚ ਜੋਨ ਨੂੰ ਪ੍ਰਾਪਤ ਕਰ ਲਈ ਸੀ ਕਰ ਲਈ ਹੋਰ ਸੰਸਾਰ ਚੋਂ ਉਹਨੂੰ ਲੂ ਲੈਣ ਵਾਸਤੇ ਉਹਨਾਂ ਬਾਅਦ ਕੁਝ ਵੀ ਲੈ ਪ੍ਰਾਪਤ ਕਰਨ ਦੀ ਸਭ ਤੋਂ ਉੱਤਮ ਸਤਿ ਉਸ ਨੇ ਪ੍ਰਾਪਤ ਕਰ ਲਈ ਇੱਕ ਤਾਂ ਆਇਆ ਆਇਆ ਕੀ ਕਰਨ ਸੀ ਤੇ ਇੱਕ ਤਾਂ ਆਇਆ ਆਪਣੇ ਚਿੱਤ ਬਣ ਕਰਕੇ ਵੀ ਇੱਕ ਸਾਰੇ ਸੰਸਾਰ ਨਾਲ ਵੀ ਇੱਕ ਤਾਂ ਸਭ ਕੋ ਮਿਲਣ ਆਪ ਹਮ ਆਪਨ ਕੀ ਨਾ ਸਭ ਹੋ ਕੇ ਇਹ ਅੰਦਰੇ ਜਿਦਾ ਵੀ ਬਾਹਰ ਸਭ ਨਾਲੇ ਇੱਕ ਤਾਂ ਇੱਕ ਪਿਤਾ ਇੱਕ ਸੇ ਹਮ ਭਾਰਤ ਤੂੰ ਮੇਰਾ ਗੁਰ ਹਾਈ ਉਹਦੀ ਇੱਜ਼ਤ ਹੈ ਸਭ ਨੂੰ ਉਹਦੇ ਸਭ ਆਪਣੀ ਤੇ ਪਰਾਇਆ ਕੋਈ ਨਹੀਂ ਇਤੋਂ ਹੁੰਦਾ ਭਗਤਾਂ ਨੂੰ ਲੋਕ ਤਾਹੀ ਸਾਲਾਂ ਨੂੰ ਫਰੇਸ ਸਮਝਦੇ ਨੇ ਭਗਤਾਂ ਬਾਅਦ ਸਾਰਾ ਸੰਸਾਰ ਇੱਕੋ ਦੇ ਜਿਨ ਧੁਰ ਲੇਖ ਲਿਖਾ ਅਰਕੇ ਗੋਣਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀਂ ਕੋਈ ਪ੍ਰਕ ਸੇਵਾ ਕਰਦੇ ਨੇ ਪ੍ਰਕ ਆਤਮੰਗਿ ਵਾਜ ਅਨੁਸਾਰ ਨੇ ਗੁਰਮਤਿ ਦੇ ਰਾਹ ਤੇ ਮਾਰਗ ਤੇ ਚੱਲਦੇ ਨੇ ਤੁਰ ਆਪਣੇ ਹਿਰਦੇ ਵਿਚ ਲਿਖਿਆ ਹੋਇਆ ਅਸੀਂ ਤਾਂ ਐ ਰਾਹ ਚੱਲ ਜਿਨ੍ਹਾਂ ਨੇ ਬੰਦਿਆ ਹੋਇਆ ਉਹ ਹੋਰ ਦੂਜਾ ਰਾਹ ਨਹੀਂ ਚੱਲਣਾ ਇਹ ਸਾਡੇ ਵਾਸਤੇ ਨਹੀਂ ਹੈ ਇਹ ਤੋਂ ਲਾਭਦਾਇਕ ਕੋਈ ਸਾਡੇ ਵਾਸਤੇ ਕੰਮ ਨਹੀਂ ਹੈ ਉਹ ਐਸੇ ਮਾਰਗ ਤੇ ਚੱਲ ਰਹੇ ਨੇ ਹਰ ਗੁਣ ਨੇ ਤਾਂ ਗਾਉਦੇ ਬਹੁਤ ਗੁਣੇ ਗਾਉਦੇ ਰਹਿੰਦੇ ਨੇ ਆਪਣੇ ਅੰਸਾਰ ਦਾ ਸਿਆਰ ਕਰਦੇ ਰਹਿੰਦੇ ਨੇ ਹਰ ਗੁਣ ਦਾ ਹੈ ਗੁਣੇ ਹਰ ਗੁਣ ਦੋਹਦੇ ਨੇ ਹਰ ਗੁਣ ਤੇ ਗੁਰੂ ਹਰ ਤੇ ਗੁਰੂ ਨੂੰ ਸਮਝਾਉਂਦੇ ਨੇ ਲੋਕਾਂ ਨੂੰ ਆਪਣੇ ਮਨ ਨੂੰ ਵੀ ਸਮਝਾਉਂਦੇ ਨੇ ਅਸਲ 'ਚ ਆਪਣੇ ਮਨ ਨੂੰ ਸਮਝਾਉਂਦੇ ਨੇ ਆਪਣੇ ਮਨ ਨੂੰ ਸਮਝਾਉਂਦੇ ਨੇ ਤੇ ਲੋਕਾਂ ਦੇ ਮਨ ਵੀ ਉਲਾਲੇ ਸਮਝਦੇ ਰਹਿੰਦੇ ਵੜਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰਨਾਮ ਸਮਾਹੀ ਵੜਿਆਈ ਵੱਡੀ ਗੁਰਮੁਖਾਂ ਗੁਰਮੁਖਾਂ ਵਾਸਤੇ ਵੜਿਆਈ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਗੁਰਬਾਤਾਰ ਦੀ ਮਿਲਾਈ ਪੂਰੇ ਗਿਆਨ ਲੈ ਕੇ ਪੂਰਾ ਗਿਆਨ ਲੈ ਕੇ ਹਰ ਆਪਣੇ ਬੂਲ ਦੇ ਵਿੱਚ ਆ ਜਾਂਦੇ ਨੇ ਹਰਨਾਮ ਵਿੱਚ ਸਮਾ ਜਾਂਦੇ ਨੇ ਸੁਰਤ ਉਹਨਾਂ ਦੀ ਸ਼ਬਦ ਵਿੱਚ ਸਮਾ ਜਾਂਦੀ ਹੈ ਸਭਾਈ ਰਹਿੰਦੀ ਹੈ ਸਹੀ ਸਟਾਰਮੀ ਪ੍ਰੋਡੂਸ ਸਮਾਪਤੀ ਹੈ ਜੀ ਹਾਂ ਜੀ